ਸੈਸ ਕਤੇ ਲਖ ਖਟੇ ਲਖ ਕੋ ਉੱਠਦਾ ਹੈ ਤਿਰਤਰਾਵੇ ਮਾਇਆ ਪਰਛੇ ਪਾਵਣ ਤਿਰਤਰਾਵੇ ਮਾਇਆ ਪਛੇ ਪਾਵਣ ਪਾਵੈ ਵੀ ਕਹਿ ਸਕਦੇ ਆ ਸੀ ਵੀ ਕਹਿ ਸਕਦੇ ਧਾਵੈ ਵੀ ਸਾਰੇ ਸਾਰੇ ਰੋ ਸਾਰੇ ਇਨ ਇਥੇ ਇੱਕ ਗੜਾ ਉਥੇ ਗੜਾ ਕਈ ਕਿ ਇੱਕ ਵਜਨ ਕਹੀਏ ਤਾਂ ਕਿਸੇ ਇੱਕ ਵੀ ਗੱਲ ਹੋਣੀ ਕਿਸ ਕੀ ਦੀ ਗੱਲ ਹੋਣੀ ਭੁੱਲਣ ਦੀ ਹੋਣੀ ਜਿਵੇਂ ਸੈਦ ਕਟੇ ਲਾਕੋਟ ਧਾਵਨ ਕਹਿ ਜੀ ਸਿਰ ਸਾਰਿਆਂ ਦੇ ਲਾਗੂ ਨਹੀਂ ਕੋਈ ਸ਼ੰਕਾ ਵਾਲੀ ਗੱਲ ਨਹੀਂ ਸਾਰੇ ਕਰਦੇ ਹੀ ਸੈਦ ਕਟੇ ਲਾਕੋਟ ਧਾਵਨ ਇਹ ਸਾਰੇ ਧਾਵਨ ਪਾੜ ਕਰਨਾ ਚਾਹੀਦਾ ਤ੍ਰਿਪਤਿ ਨ ਆਵੇ ਮਾਇਆ ਪਾਛੇ ਪਾਵੇ ਤ੍ਰਿਪਤਿ ਨ ਆਵੇ ਮਾਇਆ ਪਾਛੇ ਪਾਵੇ ਆਵੇਂ ਜੇ ਨੀ ਤ੍ਰਿਪਤੀ ਸਾਰਿਆਂ ਨੂੰ ਮਾਇਆ ਪਾਛੇ ਪਾਵੇ ਮਾਇਆ ਪਾਛੇ ਪਾਵੇ ਉੱਤੇ ਪਾਵੇ ਮਾਇਆ ਦੇ ਪਿੱਛੇ ਪਾਵੇ পিছে পায় না পর রাজা কোই নহি তো কোই ভি হো না সে সোনা দা מרগা আয়েগা হামকো জিদান রিতিনি হরি মান জাদি বধি জমা করি যাতা হ্যাঁ জি অনিক ভোগ দেখিয়া কে ਅਨੇਕਾ ਬੋਝ ਕਿ ਕਰੇ ਕਰਦਾ ਹੈ ਅਨੇਕਾ ਬੋਝ ਉਹ ਖਿਆਲ ਦੇ ਕੋ ਕਰਦਾ ਜੀਵ ਹੈ ਨਹਿਤਰ ਤਾ ਤ੍ਰਿਪਤ ਆਵੇ ਸਭ ਖਾ ਖਪਾ ਮਾਇਆ ਦੇ ਪਿੱਛੇ ਇਹਦੇ ਖਾਤਰ ਉਹ ਖਾ ਲਾਂ ਉਹ ਬਣਾ ਲਾਂ ਉਹ ਜਾਇਆ ਟਲੋੜ ਜਾ ਸੋਰ ਸੁਭਾਂਤ ਜੀ ਰੋਟੀ ਕਪੜਾ ਹੀ ਆਦਾ ਸਰ ਉਦੋਂ ਦਾ ਰੋਟੀ ਹੋਸੀ ਸੀ ਗੱਲ ਹਾਂਜੀ ਬਿਨਾ ਸੰਦੋਗ ਨਹੀਂ ਕੋਈ ਰਾਜਾ ਹੈ ਸੁਪਨ ਮਨੋਰਥ ਵਿਸਥੇ ਆਹ ਸਤੋ ਐ ਕੋਈ ਰਾਜਾ ਸਦੋ ਬਤੇ ਬਿਨਾ ਕੋਈ ਰਾਜ ਨਹੀਂ ਸਰ ਤ੍ਰਪਤੀ ਹੋ ਸਕਦੀ ਇਹ ਜਿਹੜੇ ਕਾਲ ਜਨੇ ਅਸੀਂ ਇਕੱਠੇ ਕਰ ਲੈਣਾ ਕੋਈ ਆ ਸੁਪਨ ਮਨੋਰਥ ਆ ਸੁਪਨੇ ਨਹੀਂ ਲੋੜਾਂ ਮਨੋਰਥ ਲੋੜ ਨੂੰ ਕਹਿੰਦੇ ਇਹ ਸੁਪਨਿਆਂ ਦੀਆਂ ਲੋੜਾਂ ਨੇ ਇਹਦੇ ਪਿੱਛੇ ਅਸੀਂ ਜਿਹੜਾ ਫੋਟਾ ਇਨਾ ਧਿਆਨ ਦੇ ਤਾ ਧਿਆਨ ਦੇਣਾ ਨਹੀਂ ਚਾਹੀਦਾ। ਇਸ ਸੁਪਨੇ ਉਹਨਾਂ ਉਸ ਬਥੇ ਦਾ ਉਹ ਕਾਜ ਪਰਥੇ ਕਾਜ। ਸੁਜੂਨ ਸੁਪਨੂਰ ਉਹ ਜਿਹੜੇ ਹੁਣ ਸਾਨੂੰ ਲੱਗਦੇ ਨੇ। ਜਾਂ ਸਰੀਰ ਜਨਾ ਚ ਸਰੀਰ ਹੈ। ਸਰੀਰ ਛੱਡੇ ਬਾਅਦ ਸਾਨੂੰ ਲੱਗੂਗੀ ਇਹ ਕੰਤ ਤੇ ਨਹੀਂ ਗੁ। ਸਰੀਰ ਦਾ ਰਸਤਾ ਨਹੀਂ ਹੋਈ ਨੀ। ਜੈ ਜੀਰ ਨਾਲ ਸੀ। ਉਹ ਸਰੀਰ ਜਿਹੜਾ ਧੀਨਾ ਜੀਉ ਸਰੀਰ ਦਿਖਣਾ ਨਹੀਂ। ਫੇਰ ਆਤਮਾ ਦੀ ਭੂਮੀ ਹੁੰਦੀ ਰਹਿੰਦੀ ਆਤਮਾ ਜਾਣ ਪਛਾਣ ਵੀ ਫੇਰ ਆਉਗੀ ਜਾਨ ਯਾਦ ਸੀ ਆਤਮਾ ਕੋਲੋਂ ਨਹੀਂ ਜਾਣ ਪਛਾਣ ਹੈਡੀ ਹੁੰਦੀ ਹੈ ਜਾਗਦੀ ਫੇਰ ਹੋ ਜਾਂਦੀ ਹੈ ਜੇ ਜਾਗਦਾ ਫਿਰ ਤਾਂ ਹੋ ਜਾਂਦਾ ਜਾਗਦੇ ਕੋ ਜਾਗਦਾ ਬਿਲਾ ਹੈ ਸੁੱਤਾ ਪਿਆਈ ਤੇ ਕਿਦੂ ਨਾ ਹੁੰਦਾ ਜਾਗਣ ਸੰਸਾਰ ਬਸ ਬਸ ਰਾਤੇ ਜਾਗਦੇ ਆ ਨਾ ਸੁਤਰਨਾ ਮਹਲਾ ਬੁੱਧਾਈ ਸੁਪਣਾ ਸੁਪਨਾ ਆਪਣਾ ਮਹਲਾ ਦੇ ਜੇ ਸੁਤੇ ਸੁਪਨਾ ਦੇ ਦਿਨ ਕੱਲਾ ਕੱਲਾ ਆਪਣਾ ਮਨੋਰਥ ਬਿਠੇ ਸਭ ਕਰਦੇ ਆ ਸੁਪਨਾ ਮਹਲਾ ਉਸਨੇ ਸੁਪਨਾ ਜਿਨਾਈ ਨਾ ਕਾ ਸਾਡੇ ਉਹ ਦਰਗਾਹ ਕੱਪ ਹੋਣ ਵਾਲੇ ਦੀ ਬਿਰਥਾ ਦਾ ਰੰਗ ਸਰਬ ਸੁਖ ਹੋਏ ਬੜਪਾਗੀ ਕਿਸੇ ਪ੍ਰਾਪਤ ਹੋਏ ਦੁਆਬ ਰੰਗ ਸਰਬ ਸੁਖ ਹੋਏ ਤੇ ਨਾਮ ਦਾ ਰੰਗ ਜੜੇ ਜੇ ਆ ਸੱਚ ਲਈ ਹੋ ਜਾਈਏ ਦਾ ਰੰਗ ਜੜੇ ਨਾਮ ਦਾ ਰੰਗ ਜੜੇ ਸਰਬ ਸੁਖ ਹੋਏ ਫੇ ਸਾਰੇ ਸੁਖ ਹੋ ਜਾਂਦੇ ਬੜਪਾਗੀ ਕਿਸੇ ਪ੍ਰਾਪਤ ਹੋਏ ਪਰ ਪ੍ਰਾਪਤ ਨਹੀਂ ਹੁੰਦਾ ਕਿਸੇ ਵੱਡੇ ਪਾਗਲ ਕਰਕੇ ਪ੍ਰਾਪਤ ਹੁੰਦਾ ਸੱਚ ਸੱਚ ਦੀ ਪ੍ਰਾਪਤੀ ਔਖੀ ਹੈ ਇਹਦਾ ਰੰਗ ਔਖਾ ਚੱਲਦਾ ਪਰ ਜੇ ਰੰਗ ਚੜ ਜਾਵੇ ਸਾਰੀ ਸੋਹਣਾ ਕਰਨ ਕਰਾਵਣਾ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਆਪੇ ਆਪ ਸਦਾ ਸਦਾ ਹਰ ਜਾਪ ਕਰਨ ਆਪੇ ਆਪ ਜਿਹੜਾ ਕਰਨਾ ਕਰਾਵਣਾ ਵਾਲਾ ਉਹ ਕਰਨ ਵਾਲਾ ਇਸ ਕਾ ਇਹਦਾ ਸਿੱਖੋ ਕੋਈ ਕਾਰ ਨਹੀਂ ਲੱਗੂ ਕਾਰਨ ਕਰਾਉਣ ਆਪੇ ਆਪ ਸਦਾ ਸਦਾ ਨਾਲਗ ਹਰ ਜਾ ਨਾ ਨਾਲ ਹਰ ਜਾ ਮਨ ਦਾ ਹਰ ਅਸਲ ਯੂਨਿਟੀ ਹੈ ਉਹ ਕਾਰਨ ਸਾਬਣ ਹਰ ਇੱਕ ਦਿਓ ਖਾਲੀ ਚਲਣੀ ਹੈ ਇੱਕ ਸਾਲ ਇਤਨੀ ਸੋਚ ਹੈ ਸਾਰਿਆਂ ਦੀ ਸੋਚ ਉਹ ਬੜਾ ਸਲਾਹ ਕਰ ਇੱਕ ਦੀ ਸੋਚ ਸਾਰਿਆਂ ਦੀ ਸੋਚ ਇਸ ਕਰਕੇ ਇੱਕ ਤੁਲਤੀ ਜਿਉ ਗੱਲ ਹੈ ਮਨ ਸਾਰਿਆਂ ਦੀ ਜਦ ਇੱਕ ਹੈ ਤੋਂ ਹਰੇ ਆ ਜਾਂਦਾ ਸਾਰਿਆਂ ਬਾਅਦ ਤੇ ਲਬਜ਼ ਹਰੇ ਕੋਈ ਬੱਗੇ ਹਾਰ ਕੇ ਆੜ ਆੜ ਵਾਰ ਸੁਣਨ ਲੱਗੇ ਫਿਰ 2 3 4 ਗੁੱਤੀ ਝੁਰੋ ਜਣੀ ਇਸ ਕਰਕੇ ਸੱਚਖੰਦੀ ਜੇ ਤੀਨ ਵਾਦੀ ਉਹਦੇ ਬਾਅਦ ਕੋਈ ਲਬਜ਼ ਚੱਲਦਾ ਕਿ ਹਰ ਚੱਲਦਾ ਤਾਂ ਹਰੇ ਜਦੂਸਾ ਦੇ ਬਾਅਦ ਕਿ ਪ੍ਰਭ ਕਾ ਜਨ ਹੈ ਆ ਪ੍ਰਭੂ ਕਾ ਜਨ ਹੈ ਫਿਰ ਉਹ ਉਹ ਕੋਈ ਸਾਰਿਆਂ ਨਾਲ ਤਿਕਦਾ ਜੋ ਉਸ ਬਾਤ ਸਾਰੀ ਲਾਗੂ ਇਹੀ ਜਿਹੜਾ ਹਫਜ਼ ਜੋਗੇ ਨਾ ਜੋ ਜਰੂਰੀ ਸਾਡਾ ਘੜ ਘੜ ਹਰ ਜੂ ਵਸਾ ਹਾਂ ਘੜ ਘੜ ਹਰ ਜੂ ਵਸਾ ਲੈ ਚਿੱਤ ਕਹਿੰਦੇ ਨੇ ਸਾਰੇ ਚਿੱਤੇ ਨੇ ਬੀਜੋ ਸਾਡੇ ਮੈਂ ਓਵਰਲੂਡਡ ਹਾਂ